ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਜਿਸ ਵਖਰ ਕੋ ਲੈਣ ਤੂੰ ਆਇਆ ਹੁਣ ਤੂੰ ਜਿਹੜੀ ਚੀਜ਼ ਲੈਣ ਆਇਆ ਸੀ ਨਾ ਇਸ ਸੰਸਾਰ ਚ ਕੀ ਜਿਸ ਨੂੰ ਉਪਦੇਸ਼ ਕਰਤਾ ਸਾਰਿਆਂ ਨੂੰ ਹੋ ਗਿਆ ਉਪਦੇਸ਼ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਉਹ ਰਾਮ ਨਾਮ ਹੈ ਤੂੰ ਲੈਣ ਆਇਆ ਉਹੀ ਰਾਮ ਨਾਮ ਹੈ ਸੰਤਾਂ ਘਰੇ ਪਾਇਆ ਸੰਤਾਂ ਜਿਹੜੇ ਸੰਤ ਨੇ ਅਸਲੀ ਜਿਹਨੇ ਪਾਇਆ ਉਹ ਸੰਤ ਰਹੋਗੇ ਦੇਖੋ ਜਿਹਨੂੰ ਪ੍ਰਾਪਤ ਹੋ ਗਿਆ ਉਹ ਸੰਤ ਹੋਗੇ ਪਰ ਪਾਇਆ ਘਰ ਹੋਈ ਅੰਦਰੋਂ ਬਾਹਰੋਂ ਕਿਸੇ ਨੂੰ ਨਹੀਂ ਮਿਲਿਆ ਬਾਹਰ ਹੁੰਦਾ ਹੀ ਨਹੀਂ ਘਰੇ ਵੀ ਪਾਇਆ ਘਰੋਂ ਹੀ ਪਾਇਆ ਹੈ ਸੰਤਾਂ ਨੇ ਇਹ ਭਗਤਾਂ ਨੇ ਸਾਰਿਆਂ ਨੇ ਅੱਜ ਤੱਕ ਅੰਦਰੋਂ ਪਾਇਆ ਬਾਹਰੋਂ ਨਹੀਂ ਮਿਲਿਆ ਤੇ ਬਾਹਰ ਵੀ ਦਿੱਤੇ ਕੀ ਨਾਮ ਤੇ ਬਾਹਰ ਨਾਮ ਅੰਦਰੋਂ ਨਹੀਂ ਦੱਸਦੇ ਪਾਇਆ ਦਾ ਘਰ ਉਹ ਕਹਿੰਦਾ ਸੀ ਦਿੰਨੇ ਆ ਉਹਨਾਂ ਕੋਲ ਕਿੱਥੋਂ ਆ ਗਿਆ ਹੇ ਦਿੱਤਾ ਨਹੀਂ ਜਾ ਸਕਦਾ ਕਿਹਨਾਂ ਲਿਆ ਜਾ ਸਕਦਾ ਇਹ ਆਪਣੇ ਅੰਦਰ ਖਜ਼ਾਨਾ ਉਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਆਪਣੇ ਅੰਦਰਲਾ ਹੀ ਖਜ਼ਾਨਾ ਮਿਲਣਾ ਜੋ ਰੱਖ ਗਿਆ ਸੀ ਨਾ ਦੱਬ ਦੱਬਿਆ ਹੋਇਆ ਹੈ है ਅੰਦਰਲਾ ਪਹਿਲਾਂ ਉਹ ਬਈ ਜੀ ਉਹ ਗੱਲ ਹੈ ਪਥਾਈ ਲਿਦਾ ਉਹ ਹੋ ਲਵੇ 12 ਸਿੱਧੀ ਜਾਵੇ ਉਹ ਚ ਜਿਹੜੀ ਕਮੀਆਂ ਜਾਂ ਤੇਲੀ ਭਰ ਜੂਗੀ ਪੂਰਾ ਹੋ ਗਿਆ ਤੇ ਕੁਛ ਆਰਾਮ ਨਾਲ ਛਿਗਾ ਸਾਡੇ ਕੋਲ ਕੁਛ ਕਮੀਆਂ ਕਭੀ ਪੂਰੀ ਕਰਨ ਆਸੀ ਉਹ ਪਾਵੇ ਵੀ ਉਹ ਚ ਕੁਛ ਤਾਂ ਹਰੂਰਾ ਹੋ ਉਹ ਤਾਂ ਕੋਈ ਪਉਦਾ ਹੀ ਨਹੀਂ ਪਾਵੇ ਤਾਂ ਇਹੋ ਦੱਬੇ ਹੀ ਹੋਈ ਹੈ ਕੋਈ ਜੀ ਦਬੂtheta ਪੱਟੂਗਾ ਉਹਦਾ ਡੱਟ ਖੋਲੂਗਾ ਜੋ ਵੀ ਉਹ ਤੇ ਟੱਪਣ ਚੱਕੂਗਾ ਤਾਂ ਹੀ ਕੁਝ ਹੋਰ ਪਊਗਾ। ਨਾਮ-ਨਾਮ ਬੰਦ ਕਰ ਪਾਇਆ। ਕੀ ਤੇ ਨਹੀਂ ਘਰ ਪਾਇਆ ਹੈ ਘਰ। ਉਹਨਾਂ ਨੇ ਤਾਂ ਇਹ ਤੇ ਕਰਨ। ਬਨਾਰਸ ਰਾਮਨ ਜਪੇ ਫਿਰਦੇ ਮਾਹੇ ਫੁੱਟੂ ਉੱਕੇ ਤਨੂੰ ਹੁੰਦੀ ਫਿਰਦੇ ਫਿਰਦੇ ਇਸ ਕਹਿੰਦੇ ਜਪਣਾ ਹੈ ਜਿੱਥੇ ਜਪਿਆ ਉੱਥੋਂ ਹੀ ਮਿਲਣਾ ਜਪਿਆ ਇੱਥੇ ਐ ਖੇਤੀ ਦਾ ਚੰਦਰਪਾਲ ਦੇ ਬੀਜ ਵੱਢ ਲੈਣਾ ਤੂੰ ਇੱਥੇ ਵੱਢ ਲੈਣਾ ਜਿੱਥੇ ਬੀਜ ਗਿਆ ਅੰਥੇ ਵੱਢੀ ਜਾਵੇ ਇਹ ਇੱਥੇ ਬੀਜੀ ਹੋਈ ਚੰਦਰਪਾਲ ਤੇ ਕਿੱਥੇ ਜਾ ਕਿਵੇਂ ਵੱਢ ਲੈਣਾ ਜਿੱਥੇ ਬੀਜੂਗਾ ਉੱਥੋਂ ਹੀ ਵੱਢੂਗਾ ਜਾਂਦੇ ਉਹ ਤਾਂ ਖਾਗੇ ਸੀ ਪਿੱਛੇ ਖੜਾ ਦੇਾਸ ਕੀਤੇ ਹੋਏ ਨੇ। ਸਾਰੇ ਅਭਿਮਾਨ, ਲਹਿਮਨ ਮੋੜ, ਰਾਮ ਨਾਮ ਹਿਰਦੇ ਮਹਿ ਤੋੜ। ਸਾਰੇ ਅਭਿਮਾਨ, ਸਕਾਰ ਦੇ। ਉਹ ਅਹਕਾਰੀ ਦੀ ਆਹੀ ਭਗਤੀ ਦੇ। ਨਾਮ ਆ ਮਿਲਦਾ। ਇਹ ਸੰਤਾਂ ਦੇ ਕਰੋ ਮਿਲਦਾ ਤਾਂ ਅਹਕਾਰੀਓਂ। ਸਕਾਰ ਛੱਡ ਦੋ। ਸੱਚ ਬੋਲੋ ਇਹ ਪਹਿਲਾਂ ਹੀ ਕਹਿੰਦੇ ਸੀ ਸੰਤਾ ਕੋਲੋਂ ਮਿਲਦਾ ਉਹ ਹੀ ਰੱਦ ਕੀਤੀ ਹੈ ਉਹ ਕਹਿੰਦੇ ਸੰਤਾ ਨੇ ਆਪਣੇ ਅੰਦਰੋਂ ਪਾਇਆ ਇਹ ਕੀ ਉਹ ਕਹਿੰਦੇ ਤੇ ਹੱਥੋਂ ਪਾਇਆ ਲੋਕਾਂ ਨੇ ਤੁਸੀਂ ਕਿੱਥੋਂ ਪਾਇਆ ਫਿਰ ਤੁਸੀਂ ਕਿੱਥੋਂ ਪਾਇਆ ਸੰਤਾ ਕੋਲੋਂ ਤਾਂ ਲੋਕਾਂ ਨੇ ਪਾਇਆ ਸੰਤਾ ਨੇ ਕਿੱਥੋਂ ਪਾਇਆ ਜੇ ਕੋਈ ਵਪਾਰੀ ਹੈ ਹੋਲ ਸੇਲਰ ਉਹ ਕਿਥੋਂ ਦਾ ਲੈ ਕੇ ਆਉਂਦਾ ਤਾਂ ਹੀ ਗਾਹ ਸਪਲਾਈ ਕਰਦਾ ਉਹ ਹੋਲ ਸੇਲਰ ਕਿੱਥੋਂ ਲੈ ਕੇ ਆਇਆ ਉਹ ਦੱਸ ਤੋਂ ਹੋਲ ਸੇਲਰ ਮੰਨ ਲੈਂਦੇ ਆਪਾਂ ਉਹ ਤੇ ਜੇਲੇ ਵਾਲਾ ਤੂੰ ਕਿਥੋਂ ਲੈ ਕੇ ਆਇਆ ਉਹ ਤਾਂ ਗੱਲ ਬਣੇ ਆ ਪੁੱਛਿਆ ਇਹ ਸੰਕਾਰ ਛੱਡ ਦੇ ਹੈ ਵੀ ਮੇਰੇ ਹੱਥ 'ਚ ਅਰਥ ਬਦਾਲਣ ਦੇ ਨਾਮ ਜਫਰ ਦੀ ਯੁਕਤੀ ਇਹ ਛੜਦੇ ਗੱਲ ਪੂਰਤ ਕਿਥੋਂ ਲੱਗਿਆ 10 ਕਦੇ ਮਿਲਿਆ ਤੈਨੂੰ ਅੱਜ ਤੱਕ ਕਿਸੇ ਨੇ ਨਹੀਂ ਦਿੱਤੇ ਥੰਮ ਵੀ ਦਸਰ ਸਾਨੂੰ ਕਦੇ ਹਾਂ ਤਾਰੀ ਅਬ ਮੋਲ ਰੋ ਮਾਨ ਮੋਲ ਜਿਹੜਾ ਮਾਨ ਆ ਨਾ ਮਾਨ ਇਹਦੇ ਬੱਤੇ ਲੈ ਲੋ ਇਹਨੂੰ ਮਾਨਬੇਚੇ ਸਤਪੁਰ ਕੇ ਪਾਸ ਬੰਦੇ RAM LIO ਹੈ ਮੋਲ ਬੁੱਧੀ ਕਹਿੰਦੇ ਮੈਂ RAM LISA ਮੋਲ ਪਰ ਆਪਣਾ ਮੰਦੇ ਤੇ ਉਹ ਕੀ ਗੱਲ एक ਤਾ ਇੱਕ ਹੋਰ ਤਾਂ ਬੱਚੀ ਹੈ ਲਕੀ ਉਹਦਾ ਵਿਆਹ ਹੋ ਗਿਆ ਕਿਆ ਹੋ ਗਿਆ ਉਹ ਅਜੀ ਉਹਦਾ ਲड़का ਹੈ ਆਦਮੀ ਹੈ ਉਹਦਾ ਪਤੀ ਹੈ ਜੇ ਉਹਨੂੰ ਆਪਣਾ ਆ ਗੱਲ ਕਹੀ ਆ ਬਹੁਤ ਤਕੜੀ ਗੱਲ ਕਹੀ ਆ ਬਹੁਤ ਸਵਾਜ ਦੇ ਵਿੱਚ ਪਲਟਾ ਦੇ ਦੂ ਵੀ ਜੋ ਹਲਦੀ ਹੈ ਜਿਹੜੀ ਪੂਰੇ ਦੇਰ ਖਲਾਸਾ ਹੋ ਜੇ ਕੋਈ ਗਲੇ ਨਹੀਂ ਨਾ ਸੰਸਾਰ ਇੱਕੋ ਤਕੜਾ ਹੀ ਪੁਆਇੰਟ ਹੋਈ ਬੰਦੇ राम लियो ਹੈ ਮੂਰਗੋਲ ਮੈਂ ਸੀਤਾ ਕਨੀਆ ਨਾਲ ਆਮੋ ਲੈ ਲਿਆ ਫਿਰ ਕਹਿਣੇ ਪਰ ਮੈਂ ਵੀ ਆਪਣਾ ਆਪ ਨੂੰ ਵੇਚਦਾ ਪਰ ਬੰਦੇ ਜਿੱਦਾ ਬਨੇ ਦੇਤਾ ਆਗਿਆਕਾਰੀ ਹੈ ਉਹ ਜਿਹਨੇ ਬੰਦੇ ਦਿੱਤਾ ਆ ਕਾਰੀ ਹੋ ਗਈ ਮਨ ਵੇਚ ਕੇ ਸੱਤੇ ਸੱਤ ਕਹੂੰ ਪਰ ਉਹ ਖਿਆਲ ਰੱਖੂਗਾ ਜੇ ਅੱਗੇ ਕਰੀਏ ਆ ਗਿਆ ਕਾਰੀ ਦਾ ਉਹ ਵੀ ਖਿਆਲ ਰੱਖੂ ਵੀ ਇਹਨੂੰ ਕਿਤੇ ਕਿਤੇ ਮੇਰਾ ਇਹ ਜੇ ਗੱਲ ਤੇ ਇਹ ਮਤਲਬ ਇਹਨੂੰ ਦੁੱਖ ਨਾ ਹੋਵੇ ਇਹ ਬੇਝੂਸ ਨਾ ਹੋਵੇ ਤੇ ਮੈਂ ਮੰਨਦਾ ਇਹ ਕਿ ਇਹਨੂੰ ਗਲਤੀ ਕੀਤੀ ਜੇ ਮੰਨਦੇ ਕਿ ਇਹਨੇ ਗਲਤੀ ਕੀਤੀ ਕਿ ਦੇ ਅੰਦਰ ਆ ਗਈ ਮੈਂ ਅਗਰਤਕਾਣ ਵਰਜੂਗਾ ਅਗਰਤਕਾਣ ਦਾ ਦੋਸ ਲੱਗ ਜਾਂਦਾ ਦੂਹਤ ਮੈਂ ਅਗਰਤਕਾਣ ਵਰਜੂਗਾ ਉਹ ਵੀ ਗਲਤ ਆ ਰਹਾ ਰਹੇ ਉਹ ਉਹ ਮੰਨਦੇ ਤਾਂ ਲੈ ਲਿਆ ਸਾਂ ਚੜ ਕੇ ਸਮਝਾ ਲਈ ਉਹਦੇ ਜੀਵਨ ਦੀ ਦੇਰ ਕਰਨਾ ਤੇ ਹੋਰ ਨੂੰ ਜਿਤਵਾਸ ਆਵੇ ਕੰਮ ਕਰ ਆ ਸਮਝੋ ਕਰ ਖੇਵਣ ਕੋਣਾ ਜੇਵਾ ਮੜਿਆ ਮੰਤ ਇਹ ਤਰੇ ਪਾਣੇ ਦੇ ਕਰ ਤਾਵਾ ਦਾ ਇਸੇ ਗੱਦੀ ਦਾ ਕਹੋ ਵੀ ਉਹਨਾਂ ਗੱਲਾਂ ਦੀ ਕਿੰਨੀ ਸ਼ੋਰਟ ਜਨਲ ਕਹਿਤੀ ਇੱਥੇ ਪਾਣੀ ਸਾਜਿਬ ਮਾਨ ਲਿਖੋ ਮਨ ਮੂਲ RAM ਨਾਮ ਹਿਰਦੇ ਮਹਿ ਇਹ ਜੇ ਔਰਤ ਨੇ ਇਥੇ ਔਰਤੋਂ ਜੇ ਔਰਤ ਨੇ ਅਹੰਕਾਰ ਛੱਡਿਆ ਗੁਰੂ ਘਰ ਨੇ ਛੱਡਿਆ ਅਹੰਕਾਰ ਸਾਜਿਬ ਮਾਨ ਇਹ ਤ੍ਰਿਯੋਪੰਥ ਦਾ ਆਵਾਜ਼ ਆਪਣਾ ਅਹੰਕਾਰ ਛੱਡ ਪਹਿਲਾਂ ਆਪਣਾ ਮਨ ਦੇ ਦੇ ਮਨ ਮੂਲ ਹੋਰ ਬੇਸੰਦਾ ਮਨ ਬੋਲਦਾ RAM ਨੂੰ ਲੈ ਰਾਮ ਹੋਦਾ ਈਮਾਨਾ ਅੰਦੇ ਨੂੰ ਮਾਰੂ ਮੋਰ। ਰਾਮ ਹੋਦਾ ਮਾਨਾ। ਉਹ ਚੇਤੋ ਦਾ ਬਣਿਆ ਹੈ। ਚਿਤ ਪਰਮੇਸ਼ਰ ਦਾ ਮੰਦੀ। ਪਰਮੇਸ਼ਰ ਦਾ ਅਲਾ ਮਾਨਾ ਅੰਦਲਾ ਰਾਮੂ ਨੂੰ ਬੁਰ ਲੇ। ਇਧਰੋ ਗੱਲ ਕਹੀ ਹੋਈ ਆ। ਹਾਂ ਤਾਂ ਜੀ ਜੀਵ ਨੇ। ਬੁੱਲ ਕਿਨੇ ਰਹਿਣਾ ਜੀਵ ਨੇ। ਮਨ ਕੀ ਲੈਣਾ ਮਾਰ ਪਰਮੇਸ਼ਰ ਦਾ। ਪਤੀ ਦਾ ਇਧਰੋਂ ਆਏ ਨੂੰ ਗੱਲ ਕਹੀ ਹੋਈ ਆ ਉਹ ਉਹ ਉਹੀ ਹੈ ਨਾ ਬਈ ਆਂ ਬੰਦੇ RAM ਲਿਓ ਹਰੂ ਕੋਈ ਗੱਲ ਆ ਮੈਂ ਆਪਣਾ ਮਾਰ ਪਹਿਲਾਂ ਦਿੱਤਾ ਹੈ ਤਾਰਾ ਮੁੱਲਿਆ RAM ਨੇ ਉਹ ਮਾਰੇ ਕੋ ਰਹਿ ਗਿਆ ਫਿਰ तो तो राम नाम हृदय में तोड़ राम नाम हृदय में तोड़ रहमान ही बोलता हूं बुढ़िया बोलती है जो कुछ कर दिए विवेक बुढ़िया कर दिया किता दखल ही दे रहा ਤਾਂ ਕਹੀ ਦੀ ਜਾ ਕੋਸ ਕੋਈ ਕ ਲਾਈਟ ਉਹਦਾ ਜੇ ਉਹਦੀ ਰੋਸ਼ਨੀ ਜੇ ਘੱਮ ਕਰ ਰਹੀ ਆ ਬਵੇਖ ਦੀ ਰੋਸ਼ਨੀ ਜੇ ਘੱਮ ਕਰ ਰਹੀ ਆ ਜੇ ਉਠਾਵੀ ਸ਼ਮ ਭਾਰੀ ਬਵੇਖ ਦੀ ਰੋਸ਼ਨੀ ਰਾਮ ਨਾਮ ਹਿਰਦੇ ਮਹਿ ਰਾਮ ਨਾਮ ਹੈ ਇਹਨੂੰ ਅੰਦਰ ਤੋਲ ਹਿਰਦੇ ਚ ਕੀ ਹੁੰਦਾ ਹੈ ਤੋਲ ਕੇ ਦੇਖ ਹੁੰਦਾ ਕੀ ਹੈ ਦੇ ਦੇ ਤੋਲੇ ਨੂੰ ਜਿਹਦੀ ਵੈਲਿਊ ਦੇ ਕੀ ਆ ਵੈਲਿਊ ਪਾ ਦੇ ਜਣਾ ਨਹੀਂ ਇਹ ਦੇਣ ਵਾਲੀ ਜੀ ਤੂੰ ਕਹਿੰਦਾ ਤੇਰਾ ਔਰ ਰਾਮ ਨਾਮ ਉਹ ਤਾਂ ਭਗਦਾ ਨਾਨਕ ਮੰਗੇ ਨਾਮ ਦਾ ਤੂੰ ਜਿੰਦਾ ਨਾਨਕ ਜਿਹੜੇ ਦੇਣੇ ਵਾਲੇ ਨੇ ਉਹ ਮੁਖਦੇ ਨੇ ਜਿਹੜਿਆਂ ਦੇ ਕੋਲ ਕੱਖ ਨਹੀਂ ਹੁੰਦੇ ਨੇ ਆ ਲੈ ਲੋ ਸਭ ਪਤਾਲ ਸਭ ਠੱਗ ਨੇ ਜਿਦਾਂ ਨੇ ਕੋਲ ਦਸੰਦੀ অথਟੀ ਹੈ ਦਸੰਦੀ অথਟੀ ਦੇਣ ਦੀ অথਟੀ ਨਹੀਂ ਉਹਨਾਂ ਕੋ ਜਿਨ੍ਹਾਂ ਨੇ ਬਿਆਨ ਕੀਤਾ ਨਾਮ ਨੂੰ ਦਾ ਸਿਰ ਬਿਆਨ ਹੀ ਕੀਤਾ ਦੱਸਦਾ ਨਹੀਂ ਦੇ ਦੇ ਸਕਦੇ ਦੱਸਿਆ ਕਿ ਭਾਈ ਤੇਰੇ ਅੰਦਰ ਉੱਥੇ ਮਿਲਣਾ ਉਹ ਤਾਂ ਗੈਰ ਦੇ ਵੀ ਅਸੀਂ ਦੇ ਸਕਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਨਾਮ ਨਾਮ ਹੁੰਦਾ ਕੀ ਉਹ ਦਿੰਦੇ ਬਸ ਸਿਰ ਕਰਾਉਣੇ ਕੋਈ ਨਹੀਂ ਇਹ ਕੂੜ ਨੇ ਪੂਰ ਡੋਬ ਤੇ ਇਸੇ ਕੂੜ ਨੇ ਪੂਰ ਡੋਬੇ ਨੇ ਇਹ ਜਿਹੜਾ ਕੂੜ ਹੈ ਨਾ ਨਾਮ ਦੇਣ ਵਾਲਾ ਇਹੀ ਕੂੜ ਡੋਬੇ ਪੂਰਾ ਨਾਲ ਕ ਬਖਾਣੇ ਬੈਂਤੀ ਤੇ ਦੁਬਾਰਾ ਕੂੜੋ ਕੂੜ ਇਹ ਕੂੜ ਉਹ ਸੂਰਾਂ ਦੇ ਪੂਰ ਡੋਬਣ ਵਾਲੇ ਨੇ ਕੂੜੀ ਦੇ ਨਾਮ ਦੇਣ ਵਾਲੇ ਨੇ ਹਾਂ ਜੀ ਲਾਭ خیر ਕੋ ਸੰਤੈ ਸੰਚਾਲ ਆਵਰ ਸਿਆਗ ਵਿਚਾਰ ਜੰਗਾਂ ਦਾ ਲਾਡ ਖੇਪ ਉਹ ਨਾਮ ਦੀ ਖੇਪ ਲੱਗ ਲੈ ਆਪਣੇ ਆਪਣਾ ਤੂੰ ਗਿਆਨ ਪੂਰਾ ਕਰ ਲੈ ਜਿਹੜਾ ਤੇਰੇ ਕੋ ਕਮੀਆਂ ਤੂੰ ਆਪਣੀ ਖੇਪ ਪੂਰੀ ਕਰ ਜਿੱਦੀ ਤੇਰੀ ਗੁਣ ਹੈ ਨਾ ਕਮੀ ਹੈ ਤੂੰ ਆਪਣੀ ਖੇਪ ਲੱਗ ਲੈ ਪੂਰੀ ਲਾਡ ਖੇਪ ਸੰਤਾਂ ਨਾਲ ਚਾਲ ਸੰਤਾਂ ਨਾਲ ਚਾਲ ਸੰਤ ਦੇ ਨਾਲ ਚੱਲ ਤੁਰ ਇਕ ਦੂਰ ਨੂੰ ਦੱਸੋ ਇਕ ਦੂਰ ਨਾਲ ਵਿਚਾਰੋ ਉਹ ਸਾਡੇ ਕੋਈ ਗਲਤ ਸਿਰ ਚੀਜ਼ ਵਿੱਚ ਪਾਲੀ ਹੋਵੇ ਤਾਂ ਉਹ ਗਲਤ ਧਾਰਨਾ ਵਿੱਚ ਪੈ ਗਈ ਉਹ ਕੱਢ ਕੇ ਬਾਹਰ ਸੁੱਤੀ ਇਹ ਨਾ ਵੀ ਚਪ ਕਰਕੇ ਲੈ ਕੇ ਤੁਰਪੋ ਸੰਤਾਂ ਦੇ ਨਾਲ ਜਿਸ ਕਰਦੇ ਰਹੋ ਬਿਸ਼ਨ ਗੁਲਾਸ ਕਰਦੇ ਰਹੋ ਕਿਤੇ ਕਹਾਂ ਜਾ ਨਾ ਕੋਈ ਕੋਟੀ ਚੀਜ਼ ਬਾਹਰ ਕੱਢਦੇ ਜੇ ਕਹਾਂ ਜਾ ਕੇ ਜਾਉਣਾ ਨਾ ਖਜ਼ਾਨਾ ਖੋਦੇ ਵਿੱਚੋਂ ਖੋਦੇ ਹੀ ਨਿਕੜਾ ਸਿਰ ਫਿਰ ਪਰਖਦੇ ਜਾਓ ਸੰਤਾ ਸੰਤਿਆਲ ਮਤਲਬ ਪਰਖਦੇ ਰਹੋ ਉਹਨੂੰ ਖਜ਼ਾਨਾ ਜਿਹੜਾ ਚੱਕਿਆ ਵਿੱਚ ਕੋਈ ਗਲਤ ਉਹ ਵਿੱਚ ਕੋਈ ਐਸੀ ਢਾਲਣਾ ਤਾਂ ਨਹੀਂ ਜਿਹੜੀ ਸਾਡੀ ਅਗਿਆਨਤਾ ਵਾਲੀ ਗੱਲ ਕਰ ਜੰਦਵਾਜੀ ਕੋਈ ਸਹਾਰਾ ਜਿਹੜੇ ਹੋਰ ਵਿਖਿਆ ਜਨੇ ਮਾਇਆ ਦੇ ਜੰਗਾਰ ਨੇ ਉਹ ਤਿਆਗ ਉਹ ਵਿਕਾ ਪਰ ਪੰਜ ਵਿਖਿਆ ਜੰਜਾਲ ਇਹਨੇ ਬਹੁਤ ਛੇਤੀ ਜਿਹੜੇ ਕੰਮ ਕਰਦੇ ਨੇ ਲੋਕ ਉਹ ਕੀ ਹੈ ਉਹ ਕਹਦਾਂ ਨੇ ਇਹ ਆ ਜਿਹੜਾ ਸੀ ਆਪਣਾ ਉਹ ਭਾਈ ਜਨਈਆ ਉਹ ਬਣਾਉਣਾ ਉਹ ਕੰਮ ਦੋਈਆਂ ਬਣਾਉਣੀ ਹੈ ਗੱਲ ਨਾ ਚਲਾਉਣਾ ਫਿਰ ਪੈਸੇ ਇਕੱਠੇ ਕਰਦੇ ਇਹ ਕੰਮ ਕਿਉਂ ਕਰਦੇ ਨੇ ਲੋਕ ਸੌਖੇ ਨੇ ਫਸੇ ਜਵਾਲੇ ਤੇ ਆਸਵਾਨ ਲੈਵ ਆਫਵਾਰਾ ਦੇ ਲਖਾਤਾਏ ਦੇਤਾ ਕਦੇ ਵਾਸਤੇ ਕਰਦੇ ਕਦੇ ਵਾਸਤੇ ਆਖਦੇ ਸ਼ੋਰਤ ਵਾਸਤੇ ਹੁ ਦੁਨੀਆ ਕੀ ਵੜਿਆ ਜਾਂ ਬੀਠੇ ਸੀ ਜਾਓ ਕੋਣ ਨੇ ਉੱਚੇ ਉੱਚੇ ਆਦਮੀ ਨੇ ਉੱਚੇ ਬਿਲਕੁਲ ਹੀ ਉੱਚੇ ਹੋਰ ਤਾਂ ਅਨੁਤਾਰ ਨੂੰ ਕਹੇ ਸਭ ਕੋਲੇ ਮੁਖ ਉੱਜਣ ਹਰ ਦਰਗੈ ਸੋਏ ਕੋਈ ਹਰ ਲੋਕ ਤੰਗ ਤੰਗ ਖਾਲੇ ਦੁਨੀਆਂ ਦੇ ਚਲਾਉਣੇ ਉਹ ਚਲਾਉਂਦੇ ਨੇ ਉਹ ਕਦੇ ਲੱਗੋ ਗੁਰਮੱਤ ਨੂੰ ਲੈਣਾ ਨਹੀਂ ਚਾਹੁੰਦੇ ਛੱਡਿਆ ਹੋਇਆ ਗੁਰਮੱਤ ਸਹੀ ਹੱਥਾਂ ਤੋਂ ਭੱਜਦੇ ਨੇ ਧਰਮ ਨੂੰ ਪਖੰਡ ਬਣਾ ਦੇ ਅਸਲ ਸਰਵਾਸਰੀ ਉਹਦੇ ਪੈਸੇ ਵਾਸਤੇ ਉਹ ਜੋ ਕਰ ਰਹੇ ਨੇ ਉਹ ਨੂੰ ਤੁਹਾਨੂੰ ਚਾਰਜ ਕਰਨਾ ਚਾਹੀਦਾ ਜੋ ਕਰ ਨਹੀਂ ਇਹੀ ਕਰਨਾ ਧਰਮ ਦਾ ਪਖੰਡ ਕਰਦੇ ਨੇ ਤੁਸ ਤਾਂ ਕਰਨਾ ਨਹੀਂ ਧਰਮ ਦੇ ਨਾਂ ਪੈਸੇ ਇਕੱਠੇ ਕਰ ਕਰਦੀ ਉਹ ਸੋਖੀ ਜਿਹੜੀ ਆ ਸਸਤੀ ਸ਼ੋਰ ਤੇ ਸੇ ਮਤਲਬ ਆ ਚਾਹੁੰਦੇ ਲੋਕ ਜੇ ਲੋਕ ਕਾਇਵੀ ਜਾਣਗੇ ਤੁਸ ਕਿਦ ਕੀਤਾ ਰੁਕੋ ਫੇਰ ਕਹਾ ਸਾਡੇ ਮਿਲ ਗਿਆ ਮੇਰੇ ਗਾਹਾਂ ਕੀ ਮਿੰਟ ਨਹੀਂ ਬਈ ਤੋਂ ਕਹਾ ਕੀ ਮਿੰਟ ਉਹ ਏਡੀ ਗੱਲ ਯਾਦ ਕਰਤੀ ਸੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਦਵਾ ਖੰਡਾ ਵਿੱਚ ਜਾਣੀਏ ਰਾਹ ਚੱਲੇ ਸਭ ਕੋਏ ਚੱਗਾ ਨੌਰ ਖਾ ਕੇ ਜਸ ਕੀਰਤ ਜਗ ਲੈ ਕੇ ਨਜ਼ਰ ਨਾਲ ਵੀ ਬਾਤ ਨਾ ਪੁੱਛੇ ਕੇ ਐਡੇ ਹੋਜੋਗੇ ਤੁਸੀਂ ਕਿਹਨਾਂ ਨੂੰ ਪੁੱਛਣਾ ਉਹ ਤੇ ਖੋਟੇ ਫਰਮਾਨ ਲੈ ਚੱਕੇ ਭਾਈ ਐਂਟੀ ਵਾਲੇ ਨੇ ਤੇ ਕਹਿਣਗੇ ਰਾਜਾ ਇਹ ਹੀ ਕਹੂਗਾ ਵਿਸ਼ੂ ਇਹ ਹੀ ਕਹੂਗਾ ਰਾਜੇ ਦੇ ਉਹ ਕਹਿੰਦੇ ਨੇ ਰਾਜੇ ਨੂੰ ਬੜਾ ਫਕਤਾਰੇ ਕੋਈ ਨਹੀਂ ਉਹ ਵੀ ਸਹੀ ਕਹਿੰਦੇ ਨੇ ਰਾਜੇ ਰੱਬ ਕਹਿੰਦਾ ਪੈਸਾ ਖੁਦ ਆਈਆ ਦੂਜਾ ਪੈਸਾ 1 ਨੰਬਰ ਖੁਦ ਆਈਆ ਖੁਦ ਦੂਏ ਉੱਪਰ ਤੇ ਪਹਿਲੇ ਤਸਰੀਹ ਨੂੰ ਪੁੱਛਾਈਦਾ ਪਾਣੀ ਮਿਲਦਾ ਨਹੀਂ ਹੋਣੇ ਮਰ ਜੂ ਉਹ ਕਹਿੰਦੇ ਤੇ ਪਾਣੀ ਕਿੰਨਾ ਹੋਇਆ ਤੇ ਰੱਬ ਜੰਦਾ ਹੋਇਆ ਉਹਨਾਂ ਦੀ ਉਹਨਾਂ ਦਾ ਵੀ ਗਿਆਨ ਜਿਹੜਾ ਹੈਗਾ ਉਹ ਵੀ ਠੀਕ ਹੈ ਮੂਰਖਾਂ ਦਾ ਉਹ ਵੀ ਠੀਕ ਹੈ ਗਲੀ ਲਾਉਣਾਂ ਦੀ ਉਹ ਆਪਣੀ ਗਲੀ ਲਾਉਣ ਦਿੰਦੇ ਸਾਰੀ ਤਨ ਤਨ ਕਹੇ ਸਭ ਕੋਏ ਮੁਖ ਉਜਲ ਹਰ ਵਰਗੇ ਸੋਏ ਕੋਈ ਨਹੀਂ ਕੋਈ ਹੈ ਤੇ ਸੁਚਾਰੀਆ ਕੋਈ ਨਹੀਂ ਹੁੰਦਾ ਜੇ ਕੋਏ ਬੋਲ ਲਾਂਗੇ ਉੱਥੇ ਲਾਂਗ ਹੈ ਇਹਦੀ ਕੋਈ ਲੱਭ ਸੋਈ ਸਾਡੇ ਗਲਤ ਪੜਨ ਲੱਗੇ ਕੋਈ ਦਾ ਲੱਭੇ ਨਹੀਂ ਆਇਆ ਕੋਈ ਲੱਗਦਾ ਕੋਈ ਇੱਕ ਨਹੀਂ ਉਹ ਇਹ ਵਪਾਰ ਬਿਰਲਾ ਵਪਾਰ ਹੈ ਇਹੋ ਵਪਾਰ ਇਹੋ ਇਹੋ ਵਪਾਰ ਬਿਰਲਾ ਵਪਾਰ ਹੈ ਇਹੋ ਵਪਾਰ ਬਿਰਲਾ ਵਪਾਰ ਹੈ ਇਹ ਜਿਹੜਾ ਵਪਾਰ ਹੈ ਇਹੋ ਜੀ ਵਪਾਰ ਬਿਰਲੇ ਦੇ ਜੱਗਾਂ ਨੇ ਕੀਤਾ ਇਹੋ ਇਹੋ ਜੀ ਵਪਾਰ ਬਿਰਲਾ ਵਪਾਰ ਹੈ ਇਸੇ ਵਪਾਰ ਨੂੰ ਬਿਰਲੇ ਵਪਾਰ ਇਸੇ ਬਾਬਾ ਦੇ ਫਿਰਲੇ ਵਪਾਰੀ ਹੁੰਦੇ ਨੇ ਨਾਲ ਫਿਰਲੇ ਵਪਾਰ ਦੇ ਨੇ ਵਪਾਰ ਵੰਦੇ ਆਦੀ ਕਰਦੇ ਨੇ ਨਾਲ ਤਾਂ ਕਹ ਸਤਿਵਲੇ ਹਰਿ ਨਾਮ ਕਹਿੰਦਾ ਤਾਂ ਕਿ ਸਤਿਵਲੇ ਹਰਿ ਅਸਲ ਨਾਮ ਕਹਿੰਦੇ ਨਾਲ ਨੂੰ ਸੱਚਖੰਡ ਦੇ ਆਵਾਜ਼ ਆਈ ਹੈ ਨਾਨਕਾ ਉਹ ਸਤਿਵਲੇ ਹਰਿਆ ਅਸੀਂ ਉਹਨਾਂ ਦੇ ਸੱਚਖੰਡ ਵਾਲੇ ਨਾਲ ਕਹ ਸਤਿਵਲੇ ਹਰਿ ਆਹੋ ਤਾਂ ਨੂੰ ਕਹਿਆ ਨਾਨਕ ਅਸੀਂ ਸਾਡੇ ਬਲੇਹਾ ਅਸੀਂ ਸਦਾ ਹੀ ਬਲੇਹਾ ਰਹੇ ਹਾਂ ਸਾਡੇ ਘਰ ਵਾਲੇ ਬਲੇਹਾ ਰਹੇ ਹਾਂ ਬਲੇਹਾ ਰਹੇ ਹਾਂ ਨਾਦੂਨ ਸੁਭੋਦਨ ਕੱਲ੍ਹ ਦੀ ਸੁਨੇਹਾ ਹੋਰ ਕਿਸੇ ਬਪਾਰ ਦੇ ਬਲੇਹਾ ਨਹੀਂ ਹੈਗੀ ਜੋ ਮਰਜ਼ੀ ਕਰੀ ਜਾਓ ਜੋ ਮਰਜ਼ੀ ਕਰੀ ਜਾਣੇ ਹੈ ਨਹੀਂ ਕੋਈ ਵੀ ਪ੍ਰਮਾਨ ਹੈ ਦਰਗਾਹ ਦੇ ਵਿੱਚੋਂ ਕੋਈ ਵੀ ਜਿੱਥੇ ਖਾਂਗੇ ਇੱਥੇ ਵੀ ਖਾਂਦੇ ਨੇ ਉੱਥੇ ਵੀ ਖਾਂਣਗੇ ਅਵਰ ਰਸੂਲ ਫ਼ਕੀ ਜਮ ਲਾਣਾ ਹਾਂ ਅਵਰ ਰਸੂਲ ਫ਼ਕੀ ਹੋ ਜਾਂਦੇ ਨੇ ਮੌਤ ਦੇਖ ਕੇ ਪਹਿਲਾਂ ਹੀ ਮੌਤਕ ਖੁਰਨਾ ਆਏ ਤੇ ਖਾਲ ਆਏ ਤੇ ਭੈਪੀ ਹੋ ਜਾਂਦੇ ਨੇ ਲੋਕ ਵੱਲਾ ਹੀ ਕਰਦੇ ਨੇ ਹਾਂ ਸੁਪਨੇ ਤੋਂ ਹੀ ਭੈਪੀ ਹੋ ਜਾਂਦੇ ਨੇ ਖਿਆਲ ਆਏ ਤੇ ਵੀ ਮੌਤ ਪੁਲਾਡਪੁਰ ਜਦ ਜਨਮ ਦੇ ਨੇੜੇ ਨੂੰ ਹੌਣ ਲਈ ਜਾਂਦਾ